ਰਾਬੜੀ ਸੰਕਾਦ ਕੀ ਦੇ ਬਾਰੇ ਲਿਖਿਆ ਹੈ گاਵੇਂ ਸੰਕਾਦ ਹਾਂ ਤੱਕ ਸਪੱਤਾ ਤਰਪਾਣਾਰ ਉਹਨਾਂ ਚਾਰ ਕੇਲੇ ਨੇ ਬ੍ਰਹਮ ਚੇਲੇ ਹੁੰਦੇ ਨੇ ਅੱਛਾ ਜੀ ਚੇਲੇ ਜਿਹੜੇ ਹੁੰਦੇ ਨੇ ਮੁੰਡੇ ਹੁੰਦੇ ਨੇ ਜਿਹੜੇ ਅਸਲ ਮੁੰਡੇ ਹੁੰਦੇ ਨੇ ਨਾ ਮੁੰਡੇ ਬਾਣੀ ਦੀ ਬੰਤੀ ਬੋਲਨ ਕਦੇ ਪੁੱਤਰ ਸ੍ਰੀ ਗੰਗਾ ਲਖੀਪੀਸਾ ਨਹੀਂ ਹੈਗੇ ਅੱਛਾ ਜੀ ਉਹ ਵਾਸਵਾਸ ਦਾ ਹੈ ਬੋਲਨ ਕਦਾ ਜੇ ਕੋਈ ਚੇਲਾ ਹੈ ਜਾਂ ਪੁੱਤਰ ਹੈ ਜਾਂ ਕੋਈ ਰਿਸ਼ਤੇਦਾਰ ਹੈ ਸੌ ਲੈਣ ਅੱਛਾ ਜੀ ਉਹ ਸਾਲੂ ਤੋਂ ਬਰਾਸ ਹੈ ਹਮਮ ਦਾ ਰਿਸ਼ਤ ਕੋਈ ਨਾ ਕਦਾ ਅਤਮਾ ਦਾ ਰਿਲੇਸ਼ਨਸ਼ਿਪ ਜੇ ਹੈ ਤਾਂ ਲੈਣੇ ਨਾਲ ਹੈ ਸਾਡੇ ਵਾਸਤੇ ਸ੍ਰੀ ਨਹੀਂ ਹੈ ਮਹਾਂ ਦਾ ਲੈਕਚਰ ਜਿਹੜਾ ਸੀਗਾ ਸਿਰਫ ਸਰੀਰਕ ਰਲੇਸ਼ਨ ਸੀ ਠੀਕ ਹੈ ਜੀ ਸਰੀਰਕ ਰਲੇਸ਼ਨ ਵਾਲੀ ਬੰਦੀ ਠੀਕ ਹੈ ਜੀ ਫਿਰ ਇਹ ਸੰਕਾਦ ਜਿਹੜੇ ਹਨ ਇਹ ਉਹਦੇ ਆਪਣੇ ਬ੍ਰਹਮਾ ਦੇ ਸਈਵਾਨ ਜਪੁੱਤਰ ਕੇ ਲਈ ਹੁੰਦਾ ਹਮ ਹਮ ਜੇ ਕੇਲਾ ਹੈ ਦੀਓ ਪੁੱਤਰ ਵੀ ਹੈ ਜੀ ਠੀਕ ਹੈ ਜੀ ਤਾਂ ਸਾਰੇ ਤੋਂ ਪੁੱਤਰ ਹੋ ਸਕਦਾ ਹਮ ਹਮ ਤੋਂ ਪੁੱਤਰ ਨਹੀਂ ਸਕਦੀ ਜਾ ਸਕਦਾ ਗੁਰਬਾਣੀ ਦਾ ਪ੍ਰਮਾਣ ਹੈ ਤਾਂ ਦੇ ਵਿੱਚ ਪੁੱਤਰ ਪ੍ਰਵਾਨ ਹੋ ਆ ਤਿਉਹ ਦਾਦੇ ਜੇ ਵੇਹਾ ਹੋਤਾ ਪ੍ਰਵਾਨ ਜੇ ਇਹ ਤੇ ਉਹਦਾ ਕਹੂਏ ਉਹ ਜਾਈਏ ਬੋਤਾ ਫਿਰ ਪਰਵਾਰ ਦੇ ਸਰਗਾ ਦੇ ਵਿੱਚ ਬੰਦਲਦੀ ਹੋ ਸਕਦਾ ਪਰਵਾਰ ਪੁੱਤਰ ਪਰਵਾਰਾ ਮੰਡਲ ਭਗਤੀ ਪਾਏ ਉਸ ਜਾਣਿਓ ਧੋਮ ਹਾਂ ਹਮਮ ਹਾਲਾਤਾਂ ਦੇ ਵਿੱਚ ਹੋ ਕੇ ਜਾ ਰਿਹਾ ਹੈ। ਅੱਛਾ। ਕਿਹੜਾ ਵਸਤਾ ਵਿੱਚ ਹੋ ਕੇ ਜਾ ਰਿਹਾ ਹੈ? ਹਮਮ। ਹੁੰਦਾ ਸਭ ਕੁਝ ਛਿਲਦਾ ਹੈ ਤੋਂ ਬਿਨਾਂ। ਹਮਮ। ਨਾਲ ਜੁੜ ਕੇ ਜਾ ਰਿਹਾ ਹੈ। ਅੱਛਾ। ਦੇ ਵਿੱਚ। ਇਹ ਸਾਰ ਇਹ ਗੱਲਾਂ ਕਿਹੜੀਆਂ ਨੇ? ਗੁਰਬਾਨੀ ਕੀ ਅਸਰਤ ਹੈ ਨਾ ਆਕਾਸ਼ ਕੀ ਹੂੰ ਹੂੰ ਨੇ ਆਕਾਸ਼ ਤੇ ਝੁੜ ਕੇ ਬੋਲੀ ਹੋਈ ਹੈ ਇਹ ਗੱਲ ਹੂੰ ਗੁਰਬਾਨੀ ਆਕਾਸ਼ ਨਾਲ ਝੁੜ ਕੇ ਬੋਲੀ ਜਾਂਦੀ ਹੈ ਅੱਛਾ ਜੀ ਹਿਰਦਾ ਆਕਾਸ਼ ਹੈ ਹੂੰ ਉਹ ਜਿਹੜੀ ਚੀਜ਼ ਪੈਦਾ ਹੁੰਦੀ ਹੈ ਉਹਨੂੰ ਕਹਿੰਦੇ ਕਾਸ਼ੀ ਤੇ ਤੁਰ ਉਪਜਾ ਜਾਏ ਇਹ ਪਹਿਰ ਗੱਲ ਵਿੱਚ ਤੇ ਦੂਰੇ ਹਿੱਸੇ ਚਲਦੀ ਹੈ। ਅੱਛਾ ਜੀ। ਆਹ ਤੋਂ ਇਹ ਪਹਿਰ ਦਾ ਜੋ ਇਸ ਹਾਲ ਲੈਣ ਦੇ ਦੱਸਦੇ ਚਾਬੜੀ। ਹੂੰ। ਆ ਗੱਲ ਕਰਤਾ ਫਿਰ ਕਾਸ਼ੀ ਤੇ ਤੁਰ ਪ ਜਾਏ ਤੁਰ ਕਹਾਂ ਸੁਭਾਏ। ਜੇ ਕਾਸ਼ੀਓ ਫੁੱਟ ਜਵੇ ਤੁਰਦੇ ਕਿਤੇ ਨਾ। ਹੂੰ। ਜੇ ਨਾ ਦੀ ਕਾਸ਼ੀ ਫੁੱਟ ਜਾਂਦੀ ਆ ਕਿਸੇ ਸਮਾਂ ਜਿਹੜੇ ਮਹਿਲ ਹੋ ਜਾਂਦੇ ਨੇ ਉਹਨਾਂ ਦੀ ਕਾਸੀ ਫੁੱੜਦੀ ਦੀ ਅਰੇ ਭਲਾ ਹੈ ਨਾ ਭੈਲਾ ਕਾਸੀ ਨਹੀਂ ਫੁੱਟੀ ਸਾਬਤ ਹੈ ਹੂੰ ਹੂੰ ਸਾਬਤ ਹੈ ਦੀ ਕਾਸੀ ਹੂੰ ਹੂੰ ਫਿਰ ਝੜਕਾ ਕਾਸੀ ਸਾਬਤ ਹੋਣੀ ਹੂੰ ਹੂੰ ਠੀਕ ਹੈ ਜੀ ਭਗਤੀ ਭਗਤੀ ਪਾਏ ਰਸ ਜਾਣਿਓ। ਅਸਲੀ ਤੇ ਤਮਾਹਾਰੀ ਕਾਸ਼ੀ ਤਮਾਹਾਰੀ ਕਾਸ਼ੀ ਫੁਰਦੀ ਹੁੰਦੀ ਹੈ ਦਿਲ ਵਾਲੇ ਦੀ ਫੁਰਦੀ ਹੈ। ਅੱਛਾ ਜੀ। ਭਗਤੀ ਪਾਏ ਰਸ ਜਾਣਿਓ। ਭਗਤ ਪਾਏ ਰਸ ਜਾਣਿਓ ਭਗਤੀ ਦੇ ਭਾਵ ਨਾਲ ਸੰਸਰੀ ਵੀ ਇਹ ਹੈ ਜੀ। ਅਸਲੀ ਵੀ ਕੁੱਖ ਜਾ ਜਾਣ ਕੀ ਦਾ ਪਤਾ ਲੱਗਿਆ। ਹਮ ਹਮ। ਤੇ 택ਸੀ ਤੋਂ ਬੁਖੇੜੀ ਆ ਗਈ ਤਾਂ ਫਾਇਦੇ ਰਸਾਇਣ ਤੋਂ ਹਲਕੀ ਹੂੰ ਹੂੰ ਇਹ ਅੰਦਰ ਸਾਗਰੇ ਪੁਖੇੜੀ ਨਾਲ ਹੋਇਆ ਉਹਨੂੰ ਸਾਗਰੇ ਤੇ ਪਤਾ ਨਹੀਂ ਲੱਗਿਆ ਕਿ ਹੂੰ ਫਾਟੇ ਨੇ ਉਹਨੂੰ ਪਤਾ ਰਹਦਾ ਇਹ ਉਹਦੇ ਫਾਜ਼ਦੀ ਪੁਖੇੜੀ ਆ ਗਈ ਫਾਟੇ ਨੂੰ ਅੰਗਲੀ ਲੱਗਾ ਮੂੰਹ ਹੂੰ ਹੂੰ ਠੀਕ ਹੈ ਜੀ ਉਹ ਫਾਟੇ ਨੇ ਪੁਖੇੜੀ ਆ ਗਈ ਹਮਮ ਰਾਸੀ ਗਾਉਂਦਾ ਕੋਈ ਨਾ ਠੀਕ ਹੈ ਹਾਂਜੀ ਕਵੀ ਕਲ ਸੁਜਸ ਗਾਉ ਉਹ ਗੁਰਨਾਨਕ ਜੋਗ ਜਨ ਮਾਣਿਉ ਕਲ ਕਲ ਕਰਾ ਉਹ ਜਸਦਾਇ ਉਹ ਵੀ ਉਹਨਾਂ ਨੂੰ ਐ ਪ੍ਰਸਾਦ ਬੱਲ ਦੇ ਦਿੱਤਾ ਉਹਨਾਂ ਦਾ ਪ੍ਰਸਾਦ ਕਰਦੇ ਨੇ ਸਾਰੇ ਹੂੰ ਤੇ ਉਲਟ ਕਰ ਰਹੇ ਸਨ ਮਾ ਆਹ ਲੈ ਕੇ ਮਾਰੇ ਅਨ ਗੋਲਾਸ ਨੇ ਇਹ ਉਹ ਹੈ ਹੂੰ ਹੂੰ ਲਿਖ ਲਿਆ ਸੀ ਆਹ ਵਲਟ ਬਲ ਪਾਸੇ ਪ੍ਰਤੀਸ਼ਾਸਤ ਉਹਦਾ ਬਾਫਲੀ ਵਿਚਾਰਤਾਰਾ ਹੂੰ ਹੂੰ ਆਪਣਾ ਨਾ ਨੋ ਨੋ ਚਲਵਾਤੇ ਕੋਲ ਬਾਮੀ ਰੋਟਵਾਟ ਕੈਨੇਡੀ ਪ੍ਰਚਾਰ ਕਰਦੇ ਸੀ ਠੀਕ ਹੈ ਜੀ ਹਾਂ ਤਾਂ ਹੁਣ ਵੀ ਇਹਨੀਆਂ ਪਾਰਟੀਆਂ ਜਿਹੜੀਆਂ ਇੱਦਾਂ ਚੱਲਵਾ ਲ ਜਾਂਦੇ ਪਰ ਉਹ ਲੁੱਦੇ ਕਿਤੇ ਹੋ ਕੇ ਤਾਂ ਹੋਰ ਕੁਝ ਕਹਿਣੇ ਨੇ ਹੂੰ ਹੂੰ ਬਸ ਬੜੋ ਹੈ ਭਰੂਣੀ ਕਾ ਮੈਂ ਰੀਗੋਰ ਬੰਦੇ ਗਰੋਸ ਕਰਦਾ ਹੈ ਬਰੋਸ ਕਰਦਾ ਹੈ ਨਾ ਭਰੂਣੀ ਦੇ ਨਾਲ ਦੀਦਾ ਬੰਬਲੀ ਉਪਰਚਾਰ ਕਰਦਾ ਹੈ ਹੂੰ ਹੂੰ ਹਸ ਫਾਰੇਗਾ ਕੋਈ ਬੰਦੇ ਨੂੰ ਕਰੇ ਹੋਰ ਕੋਈ ਗੱਲ ਕੁਛ ਹੋਰ ਕਰਦੇ ਪ੍ਰੈਕਟੀਕਲ ਕੁਛ ਹੋਰ ਕਰਦੇ ਹੂੰ ਹੂੰ ਪ੍ਰਚਾਰ ਨਾਲੀ ਗੱਲ ਹੈ ਫਿਰ ਕੀ ਪ੍ਰੈਕਟੀਕਲ ਉਹ ਹੀ ਕਰ ਰਹੇ ਕਹਿੰਦੇ ਨੇ ਸੁਆਲੇ ਲਈਏ ਹੂੰ ਠੀਕ ਹੈ ਜੀ ਹਾਂ ਜੀ ਹੈ ਕਪਲਾਦ ਆਰ ਜੋਗੇਸ਼ਰ ਅਪਰੰਪਰ ਅਵਤਾਰ ਵਰੂ ਇਹਦਾ ਕਪਲ ਮੁੰਡੀ ਹੈ ਇਹਨਾਂ ਦਾ ਅੱਛਾ ਜੀ ਇਹੇ ਸੀ ਨਾ ਲਿਸ਼ੇ ਸਾਥ ਤੇ ਨਾ ਡਾਕਟਰ ਕਪਲ ਮੁੰਡੀ ਚੱਕ ਕਿਛਲ ਕਹਿੰਦਾ ਤੁਸੀਂ ਉਹ ਗਿਆਨ ਦੇ ਵੀ ਪਰਮੇਸ਼ਰ ਦੇ ਗੁਣ ਗਾਰੇ ਆ ਉਹ ਵੀ ਉਹਦਾ ਯਾਸ ਕਰਦਾ ਰਹਿੰਦਾ ਤੇ ਅਪਰੰਪਰ ਅਵਤਾਰ ਉਹ ਜਦ ਨਾਲ ਜਦੋਂ ਕਰਦਾ ਜਦੋਂ ਗਾ ਨਹੀਂ ਕਰਦਾ ਜੀ ਫਿਰ ਉਹਦਾ ਉਹੀ ਹੈ ਅਵਤਾਰ ਵਰੂ ਪਰ ਉਹ ਇਹ ਕਹਿਦਾ ਰਿਹਾ ਵੀ ਆ ਪ੍ਰੰਪਰ ਅਵਤਾਰ ਹੈ ਉਹ ਹੂੰ ਹੂੰ ਤੁਸੀਂ ਕਹਿ ਦਿੰਦੇ ਹੂੰ ਜੀ ਉਹ ਖਵਲ ਮੁੰਡੀ ਕਹਿੰਦਾ ਪ੍ਰੰਪਰ ਅਵਤਾਰ ਹੈ ਵੀ ਉਹ ਅਵਤਾਰ ਹੈ ਹੈ ਤਾਂ ਸਹੀ ਅਵਤਾਰ ਸਵਜੂਦ ਤਾਂ ਹੈ ਪਰ ਉਹ ਰਹਿਣ ਵਾਲਾ ਜਦੋਂ ਮੈਂ ਬਣਦਾ ਜੀ ਪਰ ਇਹ ਤੋਂ ਪਰੇ ਹੈ ठीक है कपिल मुनि हमेशा रहे हैं और होवे जाते हैं हम्म ठीक है जी गांव हो है जम्मत गण परशुरामेश्वर कारकुठार रघु तेज हरियो बाबा परश्याम रामेश्वर नहीं जी गाव है जमत बाबा हां जगदेव जगदेव परश्याम ਦਾ ਪੁੱਤ ਹੈ ਅੱਛਾ ਜੀ ਜਿਲ੍ਹੇ ਨੂੰ ਪਰਸ਼ਾਮ ਦਾ ਦਾਪ ਹੈ ਹਮ ਹਮ ਆਵੇ ਇਹਨਾਂ ਨੇ ਵੀ ਗਾਇਆ ਹੈ ਜਿਵੇਂ ਬਰਾਬਰ ਦੇ ਅੱਛਾ ਕਲ ਕੋਠਾਰ ਹੁੰਦਾ ਸੀ ਰੱਖਦਾ ਸੀ ਤੁਸੀਂ ਕਹਿੰਦੇ ਹੁੰਦਾ ਸੀ ਹਾਂਜੀ ਉਹਨੇ ਬਹੁਤ ਕੀਤੀਆਂ ਨੇ ਥੱਲੇ ਨਹੀਂ ਫਿਰ ਕਹਿ ਸੀ ਵੀ ਮੈਂ ਕੋਹੜਾ ਰੱਖੂਗਾ ਜਾਂ ਰਗੂ ਤੇਰ ਉਤਾਰ ਲਊਗਾ ਹੂੰ ਹੂੰ ਅਰਾਮ ਚਾਹਦੇ ਤੇਜ ਖੱਟਿਆ ਫਿਰ ਠੀਕ ਤੁਸੀਂ ਕਹਾਣੀ ਸੁਣਾਉਂਦੇ ਉਹ ਵੀ ਐਸੇ ਨੂੰ ਬੋਲਦੇ ਰਹੇ ਨੇ ਉਦੀ ਜੇ ਤੁਸੀਂ ਇਜਤ ਕਰਦੇ ਹੋ ਉਹ ਵੀ ਤਾਂ ਐਸੇ ਰੁਕਉਂਦੇ ਰਹੇਗੇ ਤੁਹਾਨੂੰ ਨੇ ਹੁਤਾ ਤੁਸੀਂ ਇਸ ਵੇਲੇ ਸਦਾ ਬਰੋਸ ਕਰਦੇ ਹੋ ਠੀਕ ਹੈ ਤੁਹਾਡੇ ਸਾਰਿਆਂ ਦੀ ਲਿਸਟ ਗੜਾ ਕੇ ਇੱਕ ਸਬੂਤ ਦੇ ਰਿਹਾ ਵੀ ਸਾਰੇ ਕਹਿੰਦੇ ਰਹੇ ਤੁਸੀਂ ਵਿਰੋਧ ਕਿਸ ਵਿੱਚ ਕਰ ਰਹੇ ਹੋ ਤੁਹਾਡੇ ਰੋਲ ਮਾਡਲ ਨਹੀਂ ਹੋ ਉਹ ਕਹਿੰਦੇ ਰਹੇ ਤੁਸੀਂ ਕਿਉਂ ਛੱਡਿਆ ਹਾਂ ਹਾਂਜੀ ਉਦੋ ਅਕਰੂਰ ਬਿਦਰਗੁਣ ਗਾਵੈ ਸਰਬਾਤਮ ਜਿਨ ਜਾਣਿਉ ਉਦੋ ਇੱਕ ਭਗਤ ਦਾ ਨਾਮ ਅਕਰੂਰ ਇੱਕ ਭਗਤ ਦਾ ਨਾਮ ਹੈ ਹਮ ਬਿਦਰ ਬਿਦਰ ਭਗਤ ਦਾ ਨਾਮ ਹੈ ਗੁਣ ਦੱਸ ਮੈਂ ਰਹੇ ਅੱਛਾ ਜੀ ਕੋਨਾ ਗਾਉਂਦੇ ਇਹ ਲੋਕ ਜਪਦਾ ਸਾਡੇ ਆ ਜਿਹੜਾ ਨਾਮ ਇੱਕ ਲੈ ਕੇ ਜਪਦੇ ਨੇ ਰੈਪੀਟੇਸ਼ਨੀਆਂ ਗੁਰੂ ਸਾਹਿਬ ਦੀ ਭਗਤੀ ਹੈ ਸਾਡੀ ਗੱਲ ਹੈ ਜਿਹੜਾ ਗੁਰੂ ਸਾਹਦੇ ਨੇ ਨਾ ਨਿਆਕਾਰ ਦੇ ਇਹੀ ਭਗਤੀ ਹੈ ਹਮ ਹਮ ਇਹ ਗੁਰਬਣੀ ਹੈ ਤਾਂ ਫੇ ਜ્ઞાન ਹੈ ਤਾਂ ਉਹਨੇ ਗੁਰੂ ਦਾ ਪਤਾ ਤੁਹਾਨੂੰ ਹਮ ਹਮ ਅਸਰ ਦੇ ਵਿੱਚ ਜੋ ਜਾਣ ਉਹ ਦੱਸਿਆ ਹੈ ਗੁਰਦਾਸ ਜੋ ਸਮਝਿਆ ਉਹ ਦੱਸਿਆ ਜੋ ਦੇਖਿਆ ਉਹ ਦੱਸਿਆ ਤਬ ਦੇਖਾਂ ਤਾਉਗਾ ਬੰਦ ਜੋ ਉਹਦੇ ਦੀ ਖੂਬੀਆਂ ਦੇਖੀਆਂ ਨੇ ਦੱਸੀਆਂ ਜੋ ਕਰ ਰਹੇ ਆ ਕੁਦਰਤ ਦੇ ਵਿੱਚ ਸਭ ਕੀ ਬਹੁੰਦੇ ਉਹੀ ਦੱਸਿਆ ਠੀਕ ਹੈ ਜੀ ਭਗਤ ਨੇ ਹੰ ਘਰੂਰ ਹੈ ਵਿਗਰ ਹੈ ਹਾਂ ਸਰਬਾਤਮ ਜਿਨੀ ਜਾਣੀ ਹੈ ਹਮ ਜਿਨ ਜਾਣੀ ਹਾਂ ਸਾਰੇ ਬਾਤ ਤੁ ਵੀ ਬਿਲੀ ਜਾਣੀ ਹਾਂ ਸਾਰੇ ਵਿੱਚ ਉਹਨਾਂ ਨੇ ਇਜਾਜ਼ਤ ਕੋਈ ਆਸ ਨਹੀਂ ਦਿੰਦੇ ਉਹ ਚਲੀ ਨਹੀਂ ਕੋਈ ਦਿੱਤੇ ਹਾਂ ਹਾਂ ਭਗਤਾਂ ਦੇ ਵਿੱਚ ਉਹਨਾਂ ਨੂੰ ਸਾੜ ਦਿੱਤਾ ਹੋਇਆ ਉਹਨਾਂ ਦੀ ਗੱਲ ਨੂੰ ਰਿਜੈਕਟ ਕੀਤਾ ਹੋਇਆ ਹੈ ਹਾਂ ਭਗਤ ਨੇ ਸੱਚੇ ਨੇ ਉਹਨਾਂ ਦੀ ਗੱਲ ਗੱਲ ਨੂੰ ਤੁਸੀਂ ਉਹਦਾ ਵਿਰੋਧ ਕਿਉਂ ਕਰ ਰਹੇ ਹੋ? ਉਹਦੀ ਗੱਲ ਦਾ। ਅਹੀ ਰਹੀ ਤਾਂ। ਹੂੰ। ਉਹ ਆ ਵੀ ਤੇ ਸੇ ਮਾਰਗ ਦਾ ਵਿਰੋਧ ਕਰ ਲਿਆ ਉਹਨਾਂ ਨੂੰ ਬਖਤ ਬੋਲਦੇ। ਅੱਜ ਗੁਰਬਾਣੀ ਦਾ ਅਸੀਂ ਵਿਰੋਧ ਕਰ ਰਹੇ ਪ੍ਰੈਕਟੀਕਲ। ਗੁਰਬਾਣੀ ਨੂੰ ਬੱਲੇ ਦੇਖ ਰਹੇ ਹਾਂ। ਗੁਰਬਾਣੀ ਨੂੰ ਬੱਲੇ ਦੇਖ ਹਾਂ। ਹੂੰ। ਗੁਰਬਾਣੀ ਦਾ ਵਿਰੋਧ ਕਰ ਰਹੇ ਹਾਂ। ਜਾਣੇ ਜਾਂਣੇ। ਹੂੰ। ਕੁਝ ਜਾਣ ਕੇ ਕਰ ਰਹੇ ਨੇ, ਕੁਝ ਅਣਜਾਣ ਫੋੜੇ ਚ ਕਰ ਰਹੇ। ਹੂੰ ਜਿਹੜੇ ਜਾਣੇ ਤੋਂ ਬਾਅਦ ਵੀ ਵਿਰੋਧ ਕਰਦੇ ਨੇ ਉਹ ਕਿਉਂ ਕਰਦੇ ਨੇ ਜਾਣਨ ਦਿੱਤਾ ਚਲੋ ਕੋਈ ਗੱਲ ਨਹੀਂ ਹੂੰ ਹੂੰ ਤੁਸੀਂ ਜਿਹੜੇ ਤੋਂ ਉਹ ਹੀ ਨੇ ਦੂ ਜਿਹੜੇ ਪਹਿਲਾਂ ਦੇ ਵਿਰੋਧ ਕਰਦੇ ਨੇ ਉਹ ਹੀ ਦੌੜਦਾ ਉਹਨਾਂ ਦੇ ਰਾਹਾਂ ਦੇ ਵਿੱਚ ਆ ਜਿਹੜਾ ਜਿਹੜਾ ਜੇਰ ਵਾਲਾ ਕਾਰਗਟ ਕਰਕੇ ਬੋਲਨੇ ਜਾ ਰਹੇ ਨੇ ਨਾ ਸਭਈਏ ਇਸੇ ਵੱਲ ਟਾਰਗੇਟ ਕਰਕੇ ਸੁਭਈਏ ਬੋਲੇ ਜਾ ਰਹੇ ਨੇ ਹੂੰ ਠੀਕ ਹੈ ਜੀ ਉਹਨਾਂ ਦੀ ਔਲਾਦ ਸਾਡੇ ਵਿੱਚ ਕੁਝ ਬੈਠ ਕਰ ਗਈ ਹੂੰ ਹੂੰ ਉਹ ਵੀ ਉਹ ਵੀ ਬਰੋਦ ਉਹ ਵੀ ਬ੍ਰਾਹਮਣ ਸੀ ਸਰਵ ਦਾ ਪ੍ਰਚਾਰ ਕਰਦੇ ਸੀ ਪੰਡਿਤ ਹੋ ਗਏ ਸੀ ਠੀਕ ਰਾਮਦਾਸ ਜੀ ਪਰਮ ਗਿਆਨ ਹੂੰ ਹੂੰ ਬ੍ਰਾਹਮਣਾ ਕਰਦੇ ਸੀ ਬਰੋਦ ਬਰਮ ਗਿਆਨ ਦਾ ਹੂੰ ਹੂੰ ਕੋਈ ਹੀ ਕਰਦਾ ਰਹਿੰਦਾ ਠੀਕ ਹੈ ਜੀ। ਹਾਂ ਜੀ ਕਬੀਰ ਕਹਿ ਰਿਹਾ ਕਹੋਰੇ ਪਟਿਆ ਕਬ ਕੇ ਹੋਏ ਉਹ ਪੰਡਤ ਹੈ। ਵਿਦਵਾਨ ਹੈ ਵਿਦਵਾਨ ਦਾ ਹੱਕਾ ਵਿਰੋਧ ਕਰਨਾ। ਹੂੰ ਹੂੰ। ਲੋਕ ਦਾ। ਵਿਦਵਾਨ ਦਾ ਵਿਰੋਧ ਕਰਨਾ ਕਿਉਂਕਿ ਉਹ ਤਾਂ ਪੰਡਤ ਹੈ। ਠੀਕ ਹੈ ਜੀ। ਵਿਦਵਾਨ? ਠੀਕ ਹੈ ਜੀ। ਕਬੀਰ ਦਾ ਹੱਕ ਨਹੀਂ ਹੈ। ਠੀਕ ਹੈ ਜੀ ਸਿੱਖ ਦਾ ਹੱਕ ਨਹੀਂ ਹੈ। ਕਬੀ ਕਲ ਕਰ ਸਕਦਾ ਬ੍ਰੋ ਸਿੱਖ ਹਾਂਜੀ ਇਹ ਹੁਣ ਕਬੀ ਕਲੇ ਸੋ ਜਿਸ ਗਾਵੋ ਗੁਰਨਾਨਕ ਰਾਜ ਜੋਗ ਜਿਨ ਮਾਣੀਓ ਹਾਂਜੀ ਇਹਦੇ ਦਾ ਅਰਥ ਹਾਂਜੀ ਗਾਵ ਹੈ ਗੁਣ ਵਰਨ ਚਾਰ ਖਟ ਦਰਸ਼ਨ ਬ੍ਰਹਮਾਦਿਕ ਸਿਮਰੰਥ ਗੁਣਾ ਗਾਵ ਹੈ ਗੁਣ ਵਰ ਚਾਰੇ ਵਰਨ ਅੱਛਾ ਜੀ ਖਟ ਦਰਸ਼ਨ ਖਟ ਦਰਸ਼ਨ ਬਈ ਤਰ シュਰਗਾਰ ਹੈ ਨਾ ਦੇਖੋ ਤੇ ਵੱਡਿਆ ਕੀ ਹੋਇਆ ਸੀ ਯਾਰ ਤੁਸੀਂ ਇਹ ਤਾਂ ਦੱਸੋ ਹਮ ਹਮ ਕਾਹਲੇ ਬੜ ਲਾ ਰਹੇ ਦੇਖੋ ਹਮ ਹਮ ਉਹਦੇ ਚੋਬਰਣਾ ਕੋਸ ਕੁਝ ਹੈ ਗੱਲ ਦਾ ਕਰਦੇ ਨਾ ਰੋਧ ਕਰਦੇ ਆ ਆਪਣੀ ਖੁਦੀ ਦਾ ਆਪ ਗੁਰੂ ਕੋਲੋਂ ਪਹੁੰਚ ਵਾਸਤੇ ਆਪਣੀ ਪੂਜਾ ਕਰਨ ਵਾਸਤੇ ਸ੍ਰੀ ਕੇ ਬਾਰੇ ਉਹ ਤਾਂ ਬਰੋਗ ਕਰਦੇ ਹੋ। ਜੀ ਦਾ ਛੇ ਦਰਸ਼ਨ ਵੀ ਉਹਦਾ ਗੱਲ ਹੈ। ਛੇ ਦਰਸ਼ਨ ਇਹ ਸ਼ਾਸਤਰ ਹੈ ਜੀ, ਛੇ ਸ਼ਾਸਤਰ। ਇਹ ਆਹ ਉਹ ਸ਼ਾਸਤਰ ਵੀ ਉਹਦੇ ਵਿੱਚ ਵੀ ਹੱਦ ਉਹਦੇ ਕੋਲ ਬੱਧਿਆ ਹੋਏ ਨੇ ਤੇ ਉਹਦਾ ਵਿਰੋਧ ਕੀਤਾ ਹੋਇਆ। ਅੱਛਾ ਜੀ। ਠੀਕ ਹੈ ਜੀ। ਬ੍ਰਹਮਾਦਿਕ ਸਿਮਰੰਥ ਗੁਣਾ। ਨੇ ਬਰਮਾ ਹੋਏ ਨੇ ਵਰਪ ਜਲੀ ਹੋਏ ਨੇ ਠੀਕ ਹੈ ਜੀ ਕਿਹਨਾਂ ਉਹਦੇ ਗੁਰਾਂ ਨੂੰ ਸੁਣਿਆ ਉਹਦੇ ਗੁਰਾਂ ਨੂੰ ਯਾਦ ਕੀਤਾ ਉਹ ਵੀ ਨੇ ਬਹੁਤ سارے ਉਹਦੇ ਗੁਰ ਜਿਹੜੇ ਆਦ ਗੁਰੂ ਗ੍ਰੰਥ ਸਾਹਿਬ ਜੀ ਹੈ ਉਹ ਗੁਰ ਦੱਸੇ ਨੇ ਅੱਛਾ ਸਾਹਿਬ ਹਾਂ ਉਹ ਗੁਰ ਦੱਸਦੇ ਉਹ ਲੋਕ ਰੱਖਦੇ ਜਿਹੜੇ ਅੱਜ ਹੈ ਮਾਧਵ ਚ ਹੈ ਦੀ ਉਹ ਨੂੰ ਠੀਕ ਹੈ ਦੱਸਦੇ ਨੇ ਠੀਕ ਹੈ ਜੀ ਗਾਵੈ ਗੁਣ 6 ਸਹਿਸ ਜਹਿ ਬਰਸ ਆਦ ਅੰਤ ਲਿਵ ਲਾਗ ਤੁਨਾ ਗਾਵੈ ਗੁਰ 6 ਹੈਗਾ ਅਸਲ ਦਾ ਸ਼ੇਖ ਸ਼ੇਖ ਨੂੰ ਕਹਿੰਦੇ ਨੇ ਸ਼ੇਖ ਨੂੰ ਅੱਛਾ ਜੀ 6 ਜਿਹੜਾ ਸੇਖ ਕਹਾਇਆ ਅੱਛਾ ਜੀ ਜਿਹੜੇ ਹੈ ਆਖੀ ਜੇਕ ਜ਼ਿੰਦਗੀ ਹੂੰ ਹੂੰ ਜਿਹੜੇ ਦੂਏ ਸੀ ਨਾ ਦੋ ਤਰ੍ਹਾਂ ਦੇ ਨੇ ਇੱਥੇ ਬੱਤੇ ਅੱਛਾ ਜੀ ਕੋਈ ਦੇਵ ਨੇ ਕੁਝ ਅਦੇਵ ਦੇ ਹੂੰ ਹੂੰ ਜਿਹੜੇ ਅਦੇਵ ਦੇ ਰਾਖੇ ਜਿਹਨਾਂ ਨੂੰ ਨੇ ਉਹ ਵੀ ਕੋਣ ਪਾਉਂਦੇ ਨੇ ਪਰਮੇਸ਼ਰ ਨੇ ਉਹ ਕਹਿੰਦੇ ਵੀ ਉਹ ਠੀਕ ਢੀ ਹੈ ਰਖਾਰ ਵਾਸਤੇ ਵੀ ਉਹ ਕਹਿੰਦੇ ਹੂੰ ਹੂੰ ਮੁਸਲਮਾਨ ਵੀ ਬੁੱਧਦੇ ਨੇ ਪਰ ਐਵੇਂ ਨਹੀਂ ਕਿ ਇੱਕ ਇੱਕ ਪੂਜਤੀ ਪੂਜਾ ਕਰਦੇ ਪਰ ਇਹ ਦੂਜਾ ਦੇ ਖਾਦ ਲਈ ਜਿੱਦੂ ਉਹਨਾਂ ਦੇ ਖਾਦ ਲਈ ਹੂੰ ਹੂੰ ਉਹਨੂੰ ਭਾਈ ਰੇ ਇਹ ਇੱਥੇ ਸਹਸ ਵਾ ਸਹਸ ਅੱਗੇ ਆਉਂਦਾ ਨਾ ਕੋਈ ਨਾ ਅੱਛਾ ਸਹਸ ਜਿਹਬਾਰਸ ਹੂੰ ਸਕਦਾ ਔਰ ਜੋਤਿਆ ਗੁਰਨੀ ਦੀ ਗਾ ਸਕਦਾ ਕੋਈ ਹਮ ਹਮ ਆਰਮੀ ਦਾ ਗੁਰਨੀ ਭਗਤੀ ਕਿਸੇ ਵੀ ਜਨੂ ਚੋਧੀ ਅੱਛਾ ਜੀ ਆ ਮਾਰ ਕੇ ਬੰਗੋ ਹਰਦਾ ਹਮ ਹੈ ਕਿ ਮਹੰਲਾ ਜਿਹੜਾ ਤੁਲ ਨੇ ਉਹ ਗੁਰਬਾਣੀ ਵੀ ਪੜ ਜਿਵੇਂ ਕਹਿੰਦੇ ਸੱਪ ਨੂੰ ਕਿਉਂ ਕਿਹਾ ਸੱਪ ਨੂੰ ਦੁੱਧ ਪਿਲਾ ਦਈਏ ਉਹ ਜੋ ਜ਼ਹਿਰ ਪੈਦਾ ਹੁੰਦੀ ਹੈ ਮਾਣੋ ਕਹੇ ਸਾਜਾ ਜੇ ਸੱਪ ਦੀ ਵਰਤੀ ਹੁੰਦੀ ਆ ਗੁਰਬਾਣੀ ਪੜ ਕੇ ਵੀ ਉਹ ਸੱਪ ਉੱਠੀ ਚਲੂਗਾ ਗੁਰਬਾਣੀ ਰੋਜ਼ ਕਰੂਗਾ ਸਾਈਂ ਰੋਜ਼ ਕਰੂਗਾ ਹੂੰ ਹੂੰ ਕਹ ਰਹੇ ਆਦਮੀ ਨੇ ਲੱਗ ਹੇਲਤਾਰ ਬਈ ਸਾਰੇ ਨੇ ਵੇਦ ਪੜ ਕੇ ਆ ਕੁਛ ਕੀਤਾ ਸੱਪ ਨਹੀਂ ਹੋ ਜਿਹੜੇ ਗੁਰਬਾਣੀ ਪੜ ਕੇ ਉਹ ਨੇ ਸੱਪ ਨਹੀਂ ਹੋ ਹੂੰ ਹੂੰ ਉਹ ਖੰਦਰ ਮਾਇਦੀ ਫਾਇਦਾ ਹੋਈਆ ਪਰਦੇ ਦੇ ਬਾੜੀ ਜਿਹੜੇ ਗੁਰਬਾਣੀ ਪੜ੍ਹ ਕੇ ਪੈਦਾ ਹੁੰਦੀ ਹੈ ਜਿਹਦੇ ਨੇ ਉਹ ਸਾਰੇ ਫੇਸ ਚੇਂਜ ਹੋ ਗਏ ਉਹ ਆ ਗਏ ਸਾਰੇ ਅੱਛਾ ਜੀ ਆ ਮਾਰਦਾ ਹੈ ਕੋਈ ਦਵਾਈ ਨਹੀਂ ਹੈ ਜਿਹੜੇ ਡਾਂਟੇਵੇ ਹੂੰ ਹੂੰ ਮਨ ਦਾ ਕੀ ਪ੍ਰੋਸਾ ਕੀ ਲੈ ਨਾ ਮੈਂ ਜੋ ਹੁੰਦਾ ਅਕੋਈ ਰੋਟੀ ਖਾਉ ਉਹਦੇ ਨਾਲ ਦਾ ਰਸਤੂ ਠੀਕ ਹੈ ਜੀ ਜੀ ਦੁਬਾਰਾ ਉਹਦੇ ਕੋਲ ਚਕਾਰ ਆ ਜਾ ਹੂੰ ਹੂੰ ਵੀ ਕਹਿ ਲੋ ਚਾਹੇ ਵਿਸ਼ੇਸ਼ ਜਿਹੜਾ ਜਿਹੜਾ ਬੈਠਾ ਦਿਖਾ ਲਿਆ ਬੁਲਦੀ ਉੱਤੇ ਬੈਠਾ ਹੋ ਅੱਛਾ ਜੀ ਆਹੋ ਉਹ ਜਵਾਨ ਕਾਬੂ ਚ ਹੈ ਸਿਰਫ ਜਵਾਨ ਕਾਬੂ ਜੇ ਹੁਸਤਾ ਫੇਰੇ ਬਿਜਣਾ ਹੈ ਆਪੇ ਇਹਦਾ ਦਿਖਾ ਲਿਆ ਹੋਇਆ ਉਹ ਇਹਨਾਂ ਸੱਚੀ ਬੀਜਾ ਸਪੇਵਣਾ ਦਾ ਹਾਂ ਕਹਿੰਦਾ ਸੀਸ ਵੱਡੇ ਕਾਲ ਫੈਸਲਾ ਦੀਜਾ ਮੇਨੂੰ ਸੇਵ ਕਰੀਜਾ ਇਹ ਵੀ ਗਿਆ ਉਹਦੇ ਬਣਾ ਲਈ ਕੀਤੀ ਹੈ ਰੇਤਰੀ ਅੱਛਾ ਜੀ ਉਹ ਬਣਦੀ ਬਣਾਲੀ ਦੀ ਹੂੰ ਹੂੰ ਮਾਨਾ ਸੋਚਣੋਂ ਬੰਦ ਕੀਤਾ ਹੋਇਆ ਮਾਨ ਬਰਦਸ ਕਰ ਰਿਹਾ ਉਹਦੇ ਵਿੱਚ ਅੱਛਾ ਜੀ ਦੇਵਤੇ ਰਾਖਸ਼ੀਆ ਲੜਕਦੇ ਨੇ ਸੁਭਦ ਦਿਖਾਏ ਨੇ ਇੱਕ ਪਾਸੇ ਤਾਂ ਵਿਚਾਰਦੇ ਨੇ ਬੁੱਤੀ ਨੂੰ ਫਿਰ ਉਹ ਗੁਰਬਾਨੀ ਵਿਚਾਰ ਹੁੰਦੀ ਹੈ ਹੂੰ ਹੂੰ ਉਹਦੇ ਬਚਾਰ ਤੋਂ ਜ਼ਿਆਦਾ ਜਾਤ ਲੱਭਦਾ ਵਿੱਚੋਂ ਤਾਂ ਗੱਲਾਂ ਹੋਰ ਗਈਆਂ ਆਈਆਂ ਨੇ ਅਰਸੋਲ ਅੱਲ੍ਹਾ ਠੀਕ ਹੈ ਜੀ ਗਾਵੈ ਗੁਣ ਸ਼ੇਸ਼ ਸਹਸ ਜਹਿਬਾਰਸ ਤੇ ਜੀ ਬਾਰਸ ਹੂੰ ਹਾਂ ਜਿਹ ਬੰਨੇ ਹਾੜੜੀ ਬੰਨੇ ਸਾਰੇ ਬੰਦਿਆਂ ਹੂੰ ਸਾਰੇ ਬੰਨੇ ਬੱਕਰੀ ਬਸਾਈ ਜੀ ਪੈ ਬੱਕਰੇ ਬਤਾਂਦੇ ਹੂੰ ਹੂੰ ਸਰੀਆਂ ਮੱਤਾਂ ਨੇ ਬੱਕਰੇ ਬੱਕਰੇ ਰਸ ਨੇ ਠੀਕ ਹੈ ਜੀ ਆ ਦੁਰੀ ਸਾਰੀ ਬੱਕਰੇ ਬਸੇ ਧਰਮਾਲੀ ਨਿਆਸਾਲੂ ਦਾ ਸਾਰੇ ਬੰਦੇ ਨੇ ਠੀਕ ਹੈ ਜੀ ਆਦੰਤ ਲਾਗ ਤੁਨਾ ਪਰ ਇੱਕ ਦੂਏ ਦੇ ਜੰਗਵਾਰ ਦੇ ਤੇ ਦੂਏ ਦਾ ਜੰਗਵਾਰ ਵਡੀ ਕਰਦੇ ਠੀਕ ਹੈ ਜੀ ਸਾਰੇ ਸਾਰੇ ਨੇ ਦੂਏ ਨੂੰ ਦੇਖਣਾ ਨਹੀਂ ਹੁੰਦੇ ਹੂੰ ਵੀ ਇਹ ਦਰੂਣੋ ਕਰਕੇ ਸਾਂਝਾ ਹੋ ਜਾਏ ਹੂੰ ਤੇ ਤੁਸੀਂ ਸਾਰੇ ਪਰ ਮੈਨੂੰ ਰਾਇਆ ਬੈਠ ਕੇ ਕਰ ਲੋ ਵੀ ਗਲਤ ਕੀ ਹੈ ਠੀਕ ਕੀ ਹੈ ਬੈਠ ਕੇ ਸਬਚੋਤਾ ਕਰ ਲੋ ਠੀਕ ਤੇ ਪਹੁੰਚੋ ਸਾਰੇ ਹੂੰ ਹੂੰ ਸਾਰਾ ਠੀਕ ਬੇਲੀ ਬੋਲਣਾ ਸਾਡੇ ਵਾਲਾ ਚਾਹੇ ਗਲਤ ਹੈ ਜੀ ਠੀਕ ਹੈ ਇਹ ਫੇਸ ਹੈ ਧਰਮ ਦਾ ਪਤਾ ਲੰਗਾ ਸਾਡੇ ਵਾਲਾ ਗਲਤ ਹੈ ਪਰ ਇਹ ਠੀਕ ਹੈ ਇਸੇ ਨੂੰ ਪ੍ਰਚਾਰ ਕਰਨਾ ਇਹ ਸੇਜ ਹੈ ਇਹ ਸਭ ਨੂੰ ਇਹ ਆ ਫੜੀਰ ਸਭ ਆ ਸਵਾਲ ਕਰਦੇ ਕਰੋਨਾ ਆਦਮੀ ਬਾਦਨ ਦੇ ਪਰ ਗੱਲ ਹੈ ਇਹ ਦੇਸ਼ ਹੈ ਠੀਕ ਜੀ ਹਾਂ ਜੀ ਆਦ ਪਾਹੂਵਾਲਾ ਕੋਲ ਜੁਲਮ ਦਾ ਸਾਰਾ ਲੈ ਕੇ ਆਪਣੇ ਧਰਮ ਦਾ ਪ੍ਰਚਾਰ ਕਰਨ ਸੱਲੋਣ ਠੀਕ ਸਾਰੇ ਨਾਗੇ ਨੇ ਫਿਰ ਹੂੰ ਹੂੰ ਇਹ ਆਦਮੀ ਕੌਣ ਖਾਦੂ ਇਹ ਆਦਮੀ ਜੀ ਹੂੰ ਹੂੰ ਠੀਕ ਹੈ ਜੀ ਅ ਜਿਹੜੇ ਇੱਕ ਧਰਮ ਵਾਲੇ ਨੇ ਉਹ ਸਾਰੇ ਫੇਸ ਨੇ ਉਹਨੇ ਫੜਨੇ ਉਹਦੇ ਹੂੰ ਹੂੰ ਜੇ ਜੀ ਖਾਲਸਾ ਨੂੰ ਬੰਦੂਕ ਦੀ ਯੋਲ ਵਿੱਚ ਭਲਾਣਾ ਚਾਹਣਿਆ ਹੂੰ ਹੂੰ ਤੇ ਦੂਏ ਉਸ ਉਸ ਤਰ੍ਹਾਂ ਨੂੰ ਨਹੀਂ ਮੰਨਣਗੇ ਜਿਹੜੇ ਬੰਦੂਕ ਦੀ ਯੋਲ ਵਿੱਚ ਫੈਲਦਾ ਉਹ ਨਹੀਂ ਬੰਦੂਕ ਕੋਈ ਉਹ ਤਾਂ ਦੇ ਉਪਦੇਸ਼ ਨਾਲ ਤਾਂ ਸਾਡੇ ਬੰਨ੍ਹ ਲੈਣ ਤੇ ਅਸੀਂ ਬੰਦੂਕ ਦੀ ਯੋਲ ਨਾਲ ਆ ਫਿਰ ਸਾਡਾ ਰਾਜ ਆ ਜਿਵੇਂ ਖਲ ਠੀਕ ਹੈ ਜੀ ਹਾਂ ਜੀ ਅੰਤ ਲਿਵ ਲਾਗ ਕੇ ਲੈ ਵਲਾ ਕੇ ਸੁਰੂ ਦੇ ਗੋਲ ਨੇ ਨਾ ਤਰ ਸੁਰੂ ਤਾਂ ਇਹ ਬ੍ਰਿਜਾ ਦੇ ਬਿਜਾ ਦੇ ਤਰ ਮਾਰਾ ਜੀ ਠੀਕ ਹੈ ਜੀ ਲੈ ਵਲਾ ਕੇ ਵੀ ਹੋਣਾ ਇਹ ਕੱਪੜੇ ਤਾਂ ਤੁਹਾਨੂੰ ਜੁੜਿਆ ਹੋਇਆ ਹਾਂ ਆਪਣੀ ਤੋਰ ਹੈ ਹਮ ਰਹੂਗਾ ਜੈ ਮਾਰ ਕੇ ਵੇ ਇਹਨਾਂ ਲੈ ਕਾ ਤੁਹਾਨੂੰ ਚਾਹੇ ਘੜੀਆ ਹੈ ਚਾਹੇ ਵਧੀਆ ਹੈ ਮੈਂ ਆਪਣਾ ਵੀ ਛੱਡਣਾ ਵਧੀਆ ਦੀ ਲੈਣਾ ਹੂੰ ਹੂੰ ਵਧੀਆ ਵਾਲੇ ਨੂੰ ਘੜੀਆਂ ਦੀ ਕੋਸ਼ਿਸ਼ ਕਰਦੀ ਮੇਰੇ ਨਾਲ ਇਹ ਨਹੀਂ ਆ ਵੀਰ ਤੇਰਾ ਵਧੀਆ ਮੈਂ ਆਪਣਾ ਘੜੀਆਂ ਛੱਡ ਕੇ ਤੇਰੇ ਵਾਲਾ ਲਾਂਦਾ ਨਾ ਨਾ ਤੂੰ ਮੇਰੇ ਵਾਲਾ ਘੜੀਆਂ ਲੈ ਲੈ ਤੇ ਕਦੇ ਤੇ ਕਦੇ ਬੁੜੀ ਬੁੜੀ ਕਮਾਣ ਜਾਨ ਜੇ ਤੁਸੀਂ ਕਹਾਂਗੇ ਠੀਕ ਆਪਣੇ ਤੋਂ ਆ ਵੀ ਸਾਰੇ ਇੰਦੂਤ ਪੈਗਾ ਗੱਲ ਦੇ ਵਰਡ ਵਿੱਚ ਤੇ ਕੀ ਹੈ ਹੂੰ ਇਹ ਦੂਤ ਹੈ ਚਾਹੀਦਾ ਸਾਰੇ ਇੰਦੂ ਚਾਹੀਦੇ ਨੇ ਕੀ ਹੈ ਸਰ ਠੀਕ ਹੈ ਜੀ ਇਸੇ ਇਸ ਨੇ ਸਾਰੇ ਹੂੰ ਹੂੰ ਬਹੁਤ ਖਤਰਨਾਕ ਆਦਮੀ ਨੇ ਹੈ ਕੀ ਹੋ ਗਿਆ ਜੀ ਪਰ ਫਿਰ ਵੀ ਹੋ ਸਕਦਾ ਪਹਿਲਾਂ ਕਦੇ ਵੀ ਹੋ ਸਕਦਾ ਹੂੰ ਹੂੰ ਜੇ ਜਿੰਨਾ ਵਰਜੀਏ ਪਾਠ ਫੜੀਏ ਜਿੱਦਿਨੇ ਵਰਜੀਏ ਧਾਰਮਿਕ ਬੰਦੇ ਹੋਣ ਜਿੰਨਾ ਵਰਜੀਏ ਜੋ ਕਿਸੇ ਰੀਜਨ ਉੱਤਰ ਜਾ ਰਹੇ ਬਿਲਕੁਲ ਬੇਵਕੂਫੀ ਹੈ ਧਾਰਮਿਕ ਧਾਰਮਿਕ ਵੀ ਆਖਲ ਵੀ ਜਿਹਨਾਂ ਲੋਕਾਂ ਕੋਲ ਬੇਵਕੂਫੀ ਹੈ ਹੂੰ ਹੂੰ 6000 ਸਮਝ ਆ ਗਿਆ ਹੋਵੇ 6000 ਕਿਹੜੇ ਤਲ ਤੱਕ ਆਇਆ ਹੋਇਆ ਹੈ ਜੀ ਹਾਂਜੀ ਗਾਵੈ ਗੁਣ ਮਹਾਦੇਵ ਬੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਮਹਾਦੇਵ ਹੂੰ ਹੂੰ ਜਿਸੁ ਕੀ ਮਹਾਦੇਵ ਹੈ ਅੱਛਾ ਮਹਾਦੇਵ ਹੈ ਤਰਵਾਰ ਤੇ ਆਂਦੀ ਹੈ ਬੈਰਾਮੀ ਉਹ ਤੇ ਆਂਦੀ ਹੈ ਹੂੰ ਤਰਵਾਰ ਦਾ ਸੈਗਰੀ ਬੈਰਾਮੀ ਹੁੰਦਾ ਹੂੰ ਹੂੰ ਕੀ ਢੇਰਾ ਬਣਾ ਲਵੇ ਬੈਰਾਗੀ ਵੀ ਰੇਦਾ ਹੂੰ ਹੂੰ ਦੇ ਨਾਲ ਬਣਾ ਸਕਦਾ ਜੇ ਵੀ ਰੱਖਦੇ ਕੋਈ ਦੇ ਨਾਲ ਹੈ ਕਿਦੋਂ ਕੋ ਬੁਖਾਰ ਦੀ ਦੇਖੂਗਾ ਤੁਸੀਂ ਤੇ ਕਦੇ ਜੁਰੀ ਰਹਿਦਾ ਉਹ ਕਦੇ ਨਹੀਂ ਖਾ ਰਿਹਾ ਹੈ ਹਮਮ ਕੀ ਕਰ ਰਹੀ ਉਹਦਾ ਠੀਕ ਹੈ ਜੀ ਆਹ ਪਹਿਲਾਂ ਜੇਦਾ ਬੰਦੇ ਆ ਸੀ ਹਮਮ ਵੇਰਾ ਬਣਾ ਲਿਆ ਸੀ ਇਸ ਕਰਕੇ ਸ਼ਰਵਾ ਉਲਟੇ ਕੱਪ ਕਰਨ ਲੱਗ ਗਿਆ ਸੀ ਹੂੰ ਸਿੱਧੇ ਉੱਥੇ ਆਏ ਹੂੰ ਵਾਲੀ ਸੀਗੇ ਇਹ ਵੀ 6 ਨਾਲ ਜੀ ਸੀ ਨਾ ਥੱਲੇ ਅੱਛਾ ਜੀ ਇਹ ਅਸਰ ਵਾਲੀ ਉਹਦਾ ਡਰ ਗਿਆ ਮੁਠਿਆੜ ਗਿਆ ਹੂੰ ਪਸਨਾ ਬਾਗੇ ਫੇੜਾ ਕੁਮਾਰ ਗਿਆ ਹੂੰ ਉਹਦਾ ਮੰਮੀ ਗਿਆ ਹੂੰ ਉਹਦਾ ਭਾਜ ਗਿਆ ਪਟਾਰੀ ਚ ਸਮਾ ਬਾਗੇ ਦਸਮਾ ਬਾਗੇ ਦੇ ਬਾਅਦ ਫੇਲਾ ਮੰਗਾਲ ਗਿਆ ਉਹੀ ਫੇਜ ਆ ਗਿਆ ਗੁਰੂ ਜੀ ਦਾ ਹੂੰ ਫੇੜਾ ਕੁਮਾਰ ਗਿਆ ਨਾਲ ਨਹੀਂ ਜਾ ਹਾਂਜੀ ਜਿੰਨ ਧਿਆਨ ਨਿਰੰਤਰ ਜਾਣਿਓ। ਜਦ ਧਿਆਨ ਨਿਰੰਤਰ ਜਾਣਿਓ ਉਹ ਕਹਿੰਦੇ ਉਹਨੇ ਕੀ ਕਿਹਾ ਤੇ ਨਿਰੰਤਰ ਧਿਆਨ ਧਾਰ ਕੇ ਰੱਖੀਏ ਬਸ ਅਰ ਗਿਆ ਕੰਮ। ਅੱਛਾ ਜੀ।